ਸ਼ਲੋਕ ਮਹੱਲਾ ਪਹਿਲਾ ਦੁਖ ਵਿੱਚ ਜੰਮਣ ਦੁਖੀ ਮਰਨ ਦੁਖੀ ਵਰਤਣ ਸੰਸਾਰ ਦੁਖ ਦੁਖ ਅੱਗੇ ਆਖੀਐ ਪੜ ਪੜ ਕਰੇ ਪੁਕਾਰ ਦੁਖ ਵਿੱਚ ਜੰਮਣ ਜਿਹੜਾ ਜਨਮ ਦੁੱਖ ਵਿੱਚ ਹੁੰਦਾ ਹੈ ਕੋਈ ਸੁਖ ਨਾਲ ਨਹੀਂ ਜਮਿਆ ਦੁਖੀ ਮਰਨ ਮਨ ਵੀ ਦੁੱਖ ਜੰਮਨ ਦੀ ਦੁਖ ਰੂਪਾ ਮਨ ਵੀ ਦੁਖ ਰੂਪਾ ਸੰਸਾਰ ਦਾ ਵਰਤਨ ਜਿੰਨਾ ਕਿ ਸੰਸਾਰ ਦੀ ਜ਼ਿੰਦਗੀ ਹੈ ਵੀ ਦੁਖ ਰੂਪ ਹੈ। ਦੁਖ ਵਰਤਨ ਸੰਸਾਰ ਸੰਸਾਰ ਦੇ ਵਰਤਨਾ ਦੁਖ ਰੂਪ ਹੈ। ਪਾ ਗਏ ਸੰਸਾਰ ਤੋਂ ਅਡ ਕੱਲ ਲਵੇ, ਬੱਛੀ ਬੱਗ ਤੋਂ ਬਾਹਰ ਕਰ ਲਵੇ ਫਿਰ ਸੁਗਾ। ਜੇ ਤਾਂ ਸੰਸਾਰ ਦੇ ਵਿੱਚ ਰਹੇ ਜ਼ਿੰਦਗੀ ਬਤੀਤ ਕਰੇ ਫਿਰ ਤਾਂ ਦੁਖ ਰੂਪ ਹੈ। ਪਾ ਗਏ ਤੁਮ ਸੰਗ ਠੀਕ ਹੈ ਜੀ। ਨਾਨਕ ਦੁਖਿਆ ਸਭ ਸੰਸਾਰ ਤਾਂ ਹੀ ਲਿਖਿਆ ਸ਼ਬਦ ਹੈ ਜੀ ਉਹ ਵੀ ਗੁਰੂ ਵਾਲੇ ਸਭ ਦੁਖੀ ਰਹਿਣਗੇ ਰਹਿਦੇ ਨੇ ਤਿਆਗੀ ਲੋਗਾ ਰੀਤ ਲੋਗਾ ਰੀਤ ਚਾਲਦੀ ਲਕੀਰ ਦੇ ਫਕੀਰ ਬਣੇ ਫਿਰਦੇ ਨੇ ਲੋਕ ਛੜਤਾ ਆਪਣੀ ਲਾਇਨ ਐਡ ਦੀ ਖਿੱਚ ਲਈ ਚਲੋ ਦੁਨੀਆ ਟੱਡ ਹੋ ਗਏ ਸੁਖ ਹੋ ਗਿਆ ਕਿ ਦੇ ਨਾਲ ਦੁਖੀ ਹੋਤੀ ਹੋਜੀ दुख दुख अग्गे आखीएं पड़पड़ करे पुकार अग्गे भी यही कह रहे हैं कि दुख है दुख है मरका जाएगा वो जाएगा दुख है अग्गे भी दुख है सुनईदा पड़पड़ करया पुकार पड़ी जांदा ने यही सुनाई जंदे ना, गे ना गे है ओ आऊगा फलांदा होगा बचो कोई दान कर लो है कर लो सुख किन्नेले पास कोई दसदाई नहीं सुख दी कोई गल्ले ਸੋ ਕਿਹਦਾ ਦਾਦਾ ਦਾ ਇੱਥੇ ਹੀ ਸੁੱਖ ਮਿਲੂ ਗੱਲ ਕਰਦਾ ਆ ਮੈਨੂੰ ਕਹਦੇ ਐਂ ਉਰੇ ਸੁਖ ਹੋ ਜੂ ਕਾਹ ਆਰੇ ਸੁਖ ਦੀ ਪਰਵਰਨ ਸੁਖ ਦੀ ਕੋਈ ਗੱਲ ਕਰ ਰਹੇ ਆ ਬੜੀ ਜਾਂਦੇ ਦੱਸੀ ਜਾਂਦੇ ਨੇ ਬਿਦਵਾਨਾਂ ਦਾ ਲਿਖਿਆ ਹੋਇਆ ਹਾਂਜੀ ਦੁੱਖ ਕੀਆਂ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਓ ਜਲਾਇਆ ਦੁਖੀਆ ਚੱਲਿਆ ਰੋਇਆ ਰੋਕਿਆਂ ਪੜਣਾ ਖੋਲੀਆਂ ਸੰਸਾਰ ਆਇਆ ਸਤਿਆਂ ਪੜਣਾ ਖੁੱਲ ਗਈਆਂ ਸਾਰੀਆਂ ਦੁਖਦੀਆਂ ਹੀ ਪੜਣਾ ਲੈ ਕੇ ਆਇਆ ਹੈਗੀਆਂ ਸੰਸਾਰ 'ਚ ਜਿਹੜੀ ਪੰਨ ਖੋਲਦਾ ਉਸੇ ਦੁੱਖ ਜਿਹੜੀ ਪੰਨ ਖੋਲਦਾ ਉਸੇ ਦੁੱਖ ਜਿੱਦੋਂ ਜਾਣਦਾ ਉਹਦੇ ਨੇ ਦੁੱਖ ਰੋਕਿਆਂ ਪੜਣਾ ਖੋਲੀਆਂ ਸੁੱਖ ਨਾ ਨਿਕਲਿਆ ਕੋਈ ਇੱਕ ਵੀ ਸੁੱਖ ਦੀ ਨਿਕਲਿਆ ਵਿੱਚੋਂ ਜਿੰਨੇ ਗ੍ਰੰਥ ਖੋਲੇ ਜਿੰਨੇ ਗ੍ਰੰਥ ਪੜ੍ਹੇ ਜਿੰਨੇ ਮਤਾਂ ਖੋਲੀਆਂ ਸਾਰੀਆਂ ਚੋਂ ਦੁੱਖ ਨਿਕਲਿਆ ਸੋ ਕਿਸੇ ਜੋ ਨਹੀਂ ਨਿਕਲਿਆ ਇਹ ਨਵੀਂ ਮਾਰਗ ਬਣਾਏ ਸਾਰਿਆਂ ਦੇ ਦੁੱਖ ਨੇ ਖੜੇ ਸੋਕੇ ਤੋਂ ਵੰਦੇ ਨਿਕਲੇ ਆ। ਜੀਵ ਜਗਾਇਆ। ਆ ਕੇ ਲੈ ਰੋਏ। ਸਾਰੀ ਉਮਰ ਦੁੱਖ ਦੇ ਸੱਚੀ ਬਚੜਦਾ ਰਹਾਏ। ਦੀ ਅੱਖ ਜਲਦਾ ਰਹਾ। ਆ ਸੁਖਿਆ ਹੀ ਚੱਲਿਆ। ਜਦ ਵੀ ਦੁਖੀ ਹੋਈ ਚੀਜ਼ ਹੋ ਕੇ ਚੱਲਿਆ। ਛੱਡ ਗਿਆ ਸੰਸਾਰ ਨੂੰ ਰੋਹਤਾ ਹੀ ਗਿਆ ਦੁਖੀ ਹੋ ਕੇ ਗਿਆ। ਸੁਖ ਲੈਣ ਆਇਆ ਸੀ। ਦੁੱਖ ਨੂੰ ਛੱਡਣ ਆਇਆ ਸੀ। पर किसी ਨੇ दसया ही दी आगे वास्ते सुख परमानेंट सुख सदा सुख किमे होउगा ए दी दसया ए दसया सिर्फ कुर्बानली दे ओव assi सुनया जी जे सुख को चाहे सदा चरण राम की ले जे दसया ता assi बुधया ਦੁੱਖੀਆਂ ਅੱਗੀ ਮਾਰੀਆਂ ਈ ਦੁੱਖ دارو ਹੋਏ ਰਤਿਆਂ ਜਿਹੜਾ ਸਿਰ ਸਲਾਬ ਤੇ ਪਾਣੀ ਦੇ ਨਾਲ ਜਿਹੜੂ ਚੜ ਗਿਆ ਰਤਿਆਂ ਮਨ ਤਾਂ ਹਰਿਆ ਹੋਏ ਉਹਦਾ ਵੀ ਹਰਾ ਹੋ ਜਾਂਦਾ ਮਨ ਵੀ ਹਰਾ ਹੋ ਜਾਂਦਾ ਜੇ ਸਿਰ ਸਲਾਬ ਔਰ ਪਾਣੀ ਦੇ ਨਾਲ ਬਿਚੜ ਜਵੇ ਜੇ ਗੁਰਪਾਣੀ ਮਿੱਠੀ ਲੱਗ ਜਵੇ ਗੁਨ ਲਵੇ ਤੁਸੂਲ ਲਵੇ ਸਮਝ ਲਵੇ ਮਿੱਠੀ ਲੱਗ ਜਵੇ ਦੁੱਖੀਆਂ ਆਦੀ ਮਾਰੀਆਂ ਦੁਖੜੀਆਂ ਆਂਦਾ ਜਿਹਨਾਂ ਦੀ ਆਗੋ ਮਾਰ ਲੈਂਦਾ ਉਹਦੇ ਨੂੰ ਬੁਝ ਜਾਂਦੀ ਆਗੋ ਤੂੰ ਹਾਵ ਨਹੀਂ ਲਗੜਦਾ ਉਹ ਜਿਹੜੇ ਆਗਨਾ ਕਿੱਥੇ ਆ ਤੂੰ ਦੁਖੀ ਨੇ ਚਾਰ ਨਦੀਆਂ ਨੇ ਆਗ ਦੀਆਂ ਚਾਰੇ ਨਦੀਆਂ ਆਗ ਚਾਰੇ ਨਦੀਆਂ ਨੂੰ ਤੇ ਕਾਬੂ ਪਾ ਲੈਂਦਾ ਚਾਰੇ ਨਦੀਆਂ ਬੁਝ ਜਾਂਦੀਆਂ ਨੇ ਦੁਖੀ ਅੱਗੀ ਅੱਗੀ ਬਹੁਤ ਚਾਹੀ ਆਇਆ ਮਾਰੀਆਂ ਕੀ ਦੁਖਦਾਰੂ ਹੋਏ ਔਰ ਜਿਹੜਾ ਸੰਸਾਰੀ ਦੁੱਖ ਹੈ ਤਾਂ दारू ਬਣ ਜਾਂਦਾ ਹੈ ਇਹ ਨੁਕਤੇ ਤੋਂ ਭੱਜੀਦਾ ਨਹੀਂ ਹੁੰਦਾ ਇਹ ਦੁੱਖ ਨੂੰ ਤਾਂ दारू ਬਣਾਈਦਾ ਤਾਂ ਅੱਗਾ ਹੋ ਜਾਂਦੀ ਠੀਕ ਹੈ ਜੀ ਹੈ ਅੱਗ ਤੋਂ ਹੈ ਜੀ ਹਾਂ ਜੀ ਲਵੇ ਤਾਂ ਥਾਰੀ ਅੱਗਾ ਹੋ ਜਾਂਦੀ ਠੀਕ ਹੈ ਜੀ ਤਾਂ ਹੀ ਦੁੱਖ दारू ਸੁਖ ਰੋਗ ਪਿਆ ਸ਼ਲੋਕ ਹੈ ਜੀ ਗੁਰੂ ਨਾਨਕ ਸਾਹਿਬ ਦਾ ਹੈ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਹੂ ਪਸਖੇ ਪਸੂ ਭਸ ਕਮਾਵਣੀ ਧੀ ਭਸ ਭਰੀਐ ਦੇਹ ਨਾਨਕਾਂ ਦਾ ਦੁਨੀਆ ਜੀ ਹੈ ਭਸ ਇਕੀਆ ਖਾਕ ਹੈ ਥੋਏ ਰੰਗ ਪਸੂ ਇਹ ਪਸੂ ਦਾ ਇਹ ਰੰਗ ਹੈ ਸ਼ਰੀਰ ਦਾ ਇਹ ਮਿੱਟੀ ਦਾ ਰੰਗ ਹੈ ਰੰਗ ਹੋਰ ਕਾ ਦਾ ਹੂ ਪਸਖੇ ਅਖੀਰ ਨੂੰ ਵੀ ਇਹਨੇ ਖੇ ਬਣ ਜਾਣਾ ਉਹਨਾ ਵੀ ਇਹਨਾਂ ਬਾਅਦ ਵਿੱਚ ਖੇ ਬਣ ਜਾਣਾ। ਬੱਸ ਉਹ ਪਾਸ ਕਮਾਵਣੀ। ਇਹ ਸਰੀਰ ਨਾਲ ਜਿਹੜੀ ਪਾਸਾਂ ਨਾਲ ਕਮਾਈ ਹੁੰਦੀ ਉਹ ਪਾਸੇ ਹੁੰਦੀ ਹੈ। ਮਾਇਆ ਨਾਲ ਮਾਇਆ ਹੀ ਕਮਾਈ ਜਾਂਦੀ ਹੈ। ਸਰੀਰ ਨਾਲ ਨਹੀਂ ਕਮਾਈ ਹੋ ਸਕਦੀ ਨਾਮ ਦੀ। ਆਤਮਾ ਨਾਲ ਕਮਾਈ ਹੋ ਸਕਦੀ ਹੈ ਪਰ ਗੁੰਦੀ ਨਾਲ ਕਮਾਈ ਹੋ ਸਕਦੀ ਹੈ ਨਾਮ ਦੀ। ਸਰੀਰ ਵਿੱਚ ਰਹਿੰਦੇ ਆਂ। ਸਰੀਰ ਨਾਲ ਨਾਮ ਦੀ ਕਮਾਈ ਨਹੀਂ ਕਰ ਸਕਦਾ। ਬੱਸ ਉਹ ਕਮਾਵਣੀ ਆ ਦੇਖੋ ਦਿੱਦੀ ਆਲੀ। ਇਹ ਪਾਸ ਨਾਲ ਦਾ ਪਾਸ ਦੀ ਕਮਾਈ ਹੋਊਗੀ। ਇਹ ਖਾਲਾ ਫੇਰਦੇ ਆਂ ਪਾਸ ਨਾਲ ਹੱਥ ਨਾਲ ਕਮਾਈ ਵੀ ਤਸਦੀ ਹੋਊਗੀ ਇਹਦੇ ਨਾਲ ਜਿੱਥੇ ਸ਼ਰੀਰ ਅਨਵਲ ਬੋ ਗਿਆ ਜਿਹੜੀ ਭਗਤੀ ਦੇ ਵਿੱਚ ਉੱਥੇ ਬੱਸ ਦੀ ਕਮਾਈ ਐ ਦੇ ਆ ਦੀ ਆ ਇਹਦੇ ਤੇ ਦੇ ਹਾਰ ਪਾ ਲਓ ਸੋਨੇ ਦੇ ਮੁਕਟਾ ਲਾ ਲਓ ਵਧੀਆ ਕੱਪੜੇ ਪਾ ਲਓ ਵਧੀਆ ਖਾਣਾ ਖਾ ਲਓ ਸ਼ਰੀਰ ਤੇ ਲੱਦ ਹੋਏ ਭੱਤ ਸਾਰੀ ਜੋ ਜਿਹੜੀ ਇਹਦਾ ਮਾਰ ਦੀ ਕਮਾਈ ਹੈ ਸਮਾਦੀ ਦੀ ਕਮਾਈ ਹੈ ਜ਼ਾਹਰੀ ਜ਼ਰੀਰ ਵਾਸਤੇ ਹੀ ਹੈ ਸ਼ਰੀਰ ਸ਼ਰੀਰ ਵਾਸਤੇ ਕਮਾ ਸਕਦਾ ਆਤਮਾ ਵਾਸਤੇ ਨਹੀਂ ਕਮਾ ਸਕਦਾ ਆਤਮਾ ਆਪਣੀ ਕਮਾਈ ਆਪ ਕਰੂ ਖਾ ਸ਼ਰੀਰ ਤੇ ਆ ਗਿਆ ਚੇਤਨ ਦਾ ਗਿਆਨ ਹੋਇਆ ਸਾਰੀ ਉਮਰ ਜੜਦੇ ਉਦੇ ਚ ਰਹੇ ਆਪਾਂ ਆਪ ਸ਼ਰੀਰ ਵਾਸਤੇ ਕਰਦਾ ਰਿਹਾ ਜੋ ਕਰਦਾ ਰਿਹਾ ਹਾਂਜੀ ਜਵਾ ਜੀਵ ਵਿੱਚੋਂ ਕੱਢੀ ਹੈ ਪਸ਼ੂ ਪਰਿਆ ਜਾਏ ਅੱਗੇ ਲੇਖੇ ਮੰਗੀਏ ਹੋਰ ਦਸੂਣੀ ਪਾਏ ਜਿਹੜਾ ਜੀਓ ਆ ਪਾਸੇ ਚੋਂ ਕੱਢ ਲਿਆ ਨਾ ਇਹਦੇ ਵਿੱਚੋਂ ਸਰੀਰ ਚੋਂ ਸੇਹੀ ਪਾਸਾ ਨਾ ਕੱਢੀ ਆ ਪਸ਼ੂ ਪਰਿਆ ਜਾਏ ਕਹਿੰਦੇ ਪਸ਼ੂ ਪਰਿਆ ਜਾਂਦਾ ਅੰਤਰ ਅੰਤਰ ਉਹਦੇ ਇੱਛਾ ਪਸਦੀ ਉਹ ਹੁੰਦੀ ਹੈ ਹੋਰ ਪਰਿਆ ਕੀ ਹੈ ਕਿ ਚਾਹ ਦੀ ਹੁੰਦੀ ਹੈ ਵਿੱਚ ਇਹਦੀ ਇੱਛਾ ਹੋ ਲੈ ਕੇ ਜਾਂਦਾ ਇਹਦੀ ਇੱਛਾ ਅੱਗੇ ਲੈ ਕੇ ਕੰਮ ਕੀ ਲੈ ਕੇ ਆਇਆ ਕੀ ਕਮਾ ਕੇ ਲੈ ਕੇ ਆਇਆ ਸੋਹ ਲੈ ਗਿਆ ਇੱਛਾ ਕੇ ਆਇਆ ਉਹ ਦਸੂਣੀ ਪਾਏ ਉਹ ਕਹਿੰਦੇ ਮਾਇਆ ਦੀ ਮਾਇਆ ਚਲਾ ਕੇ ਸ਼ਲੋਕ ਕੰਬ ਜਾਣਾ ਚਾਹੀਦਾ ਜੀ ਇਹ ਤਾਂ ਸੁਣ ਕੇ ਉਸ ਤੋਂ ਅੱਗੇ ਪਾਠ ਕਰਨ ਦੀ ਉੋਛਤਾ ਰਹਿਣੀ ਚਾਹੀਦੀ ਜੀ ਇਸ ਤਰ੍ਹਾਂ ਦੀ ਅਸੀਂ ਹਰਕਤਾਂ ਕਰ ਰਹੇ ਹਾਂ ਹੁਣ ਵੀ ਹਾਂਜੀ ਜਾ ਜੀਓ ਵਿੱਚੋਂ ਕੱਢੀਐ ਪੱਸੂ ਭਰਿਆ ਜਾਏ ਅੱਗੇ ਲੇਖੇ ਮੰਗੀਐ ਹੋਰ ਦਸੂਣੀ ਪਾਏ ਆਗੋ ਹੋਰ ਮਿਲ ਜਾਂਦੇ ਨੇ ਜਨਮ ਉਹ ਤੇ ਕੜਾ ਘਟਿਆ ਜਾਂਦੇ ਜਿੰਨਾ ਜਿੰਨਾ ਤੁਰਿਆ ਮੌਜੂਦ ਰਾਜ ਪਾ ਦਿੰਦੇ ਨੇ ਹਾਂਜੀ ਔੜੀ ਮੈਂ ਸੁਣੀਐ ਸੁੱਚ ਸੰਜਮੋ ਜਮ ਨੇੜ ਨ ਆਵੇ ਮੈਂ ਸੁਣੀਐ ਘਟ ਚਾਨਣਾ ਹਨੇਰ ਗਵਾਵੇ ਭੱਤੋ ਆਗੇ ਹੁਨਾਫ ਤੇ ਉਹਨਾਂ ਦੀ ਕਵਾਈ ਤਾਂ ਪਸਦੀ ਹੈ ਨਾ ਦੀ ਪਰ ਬੜੇ ਮੰਦਲ ਨੇ ਹੀਰੇ ਰਹਿ ਜਵਾਰਾਤ ਨੇ ਪਾਸਾ ਨੇ ਲਾਲ ਜੜੇ ਹੋਏ ਨੇ ਸੋ ਦੇ ਕੁੰਦਲ ਨੇ ਸੋ ਪਾਸਾ ਮੈਂ ਸੁਣੀਐ ਜੇ ਤਾਂ ਸੁਣ ਲਈਏ ਗੁਰਬਾਣੀ ਤਾਂ ਸੱਚ ਸੁੱਲਿਏ ਸਮਝ ਲਈਏ ਸੱਚ ਸੰਝਵਾ ਉਹਦਾ ਸੱਚ ਆ ਜਾਂਦਾ ਸੰਝੋ ਹੋ ਜਾਂਦਾ ਫਿਰ ਫੇਰ ਤਿਆਰੀ ਕਰਦਾ ਫਿਰ ਫੇਰ ਔੜੀ ਔਲੀ ਕੋਦੂ ਕੋਣਦੀ ਫਿਰ ਮੰਡੀਆਂ ਬਾਗਾਂ ਖਿੱਚਦਾ ਸੰਝਵਾ ਮੰਡੀਆਂ ਬਾਗਾਂ ਖਿੱਚਦਾ ਫਿਰ ਵੀ ਕਿੱਧਰ ਵਿਚਾਰਿਆ ਤੂੰ ਉਲਟੇ ਪਾਸੇ ਆਪਾਂ ਤਾਂ ਹੋਰੇ ਪਾਸੇ ਚੱਲਦੇ ਆਂ ਕਭ ਨੇੜੇ ਨਾ ਆਵੇ ਜਾਂ ਤਾਂ ਵੀ ਨੇੜੇ ਆਉਂਦਾ ਪਰ ਬਦਲੇ ਨੇੜੇ ਫਿਰ ਆਉਦਾ ਪਰਪ ਦਾ ਦੂਰੇ ਰਹਿੰਦਾ ਇਹਦੇ ਪਰਮ ਗਿਆਨੀ ਨੇ ਤੇ ਗੱਲ ਸੁਣਦਾ ਹੀ ਨਹੀਂ ਤੇ ਮੰਨਦਾ ਹੀ ਨਹੀਂ ਉਹ ਤਾਂ ਰੇੜੇ ਆਏ ਨਹੀਂ ਸਕਦੇ। ਇੰਨਾ ਗਿਆਨ ਨਾਮ ਸੁਣਨ ਸੁਣਿਆ ਨਹੀਂ ਜਿੱਦੋ ਤੇ ਸੁਣਿਆ ਘਟ ਚਾਨਣ ਆ। ਅੰਦਰ ਚਾਨਣ ਹੋ ਜਾਂਦਾ ਹੈ। ਹੋ ਜਾਂਦਾ। ਗਿਆਨ ਗਿਆ ਗੁਰਬਾਈ ਦਾ ਇਹਦੇ ਚਾਨਣ ਹੋ ਜਾਂਦਾ। ਅਨੇਰ ਗਵਾਏ ਜਦੋਂ ਉਹਨਾਂ ਨੇ ਹਨੇਰਾ ਪੈਦਾ ਕੀਤਾ ਪਰਜਾਲ ਪਾਇਆ ਹੋਇਆ ਸਰ ਖਤਮ ਹੋ ਜਾਂਦਾ ਹਾਂਜੀ ਨਾਏ ਸੁਣੀਏ ਆਪ ਬੁੱਝੀਏ ਲਾਹਾ ਨਾਉ ਪਾਵੇ ਨਾਏ ਸੁਣੀਏ ਪਾਪ ਕੱਟੀਆਂ ਨਿਰਮਲ ਸੁਣੀਏ ਆ ਬੁੱਝੀਏ ਨਾ ਸੁਣਨ ਨਾਲ ਤਾਂ ਆਪਣਾ ਆਪ ਬੁੱਝ ਲਈਦਾ ਆਤਮਦਰਸ਼ਨ ਹੋ ਜਾਂਦਾ ਹੈ ਆਪਣੇ ਆਪ ਨੂੰ ਪਛਾਣ ਲਈਦਾ ਆਪਣਾ ਮੂਲ ਪਛਾਣ ਲਈਦਾ ਲਾਹਾ ਨਾਉ ਪਾਵੇ ਨਾਮ ਨਾਲੇ ਲਾਹਾ ਹੁੰਦਾ ਨਾ ਸੁਣੀਏ ਪਾਪ ਕੱਟਿਆ ਸਾਰੇ ਪਾਪ। ਕੱਟੇ ਜਾਂਦੇ ਨੇ ਪਾਪ ਕੀ ਹੈ ਹੁਕਮ ਦਾ ਵਿਰੋਧ ਕਰਦਾ ਜਿਹੜਾ। ਹੁਕਮ ਦਾ ਵਿਰੋਧ ਬੰਦ ਹੋ ਜਾਂਦਾ। ਪਾਣੇ ਚੱਲਦਾ। ਪਾਣੇ ਚੱਲਣਾ ਪੁਰਨਾ ਪਾਣ ਦਾ ਵਿਰੋਧ ਕਰਨਾ ਪਾਪ ਹੈ। ਪਾਪ ਕੱਟਿਆ ਜਾਂਦਾ। ਹੁਣੇ ਜਾਂਦੀ। ਹੁਣੇ ਨਹੀਂ ਰਹਿੰਦੀ ਪਾਪ ਕੱਟਿਆ ਜਾਂਦਾ। ਹੁਣ ਨਹੀਂ ਪਾਪ ਕਰਾਂਗੀ। دیرਵਲ ਸੱਚ ਪਾਵਾ ਹੈ। ਸੱਚ ਕਹਿ ਜਾਪੇ ਤਾਂ ਹੁੰਦਾ। دیرਵਲ ਬਿਲਕੁਲ ਪਿਓਰ ਸੱਚ ਪਿਓਰ ਸੱਚ ਬੱਲੇ ਪੈ ਜਾਂਦਾ ਪਿਓਰ ਸੱਚ ਦੀ ਸਮਝ ਆ ਜਾਂਦੀ ਹਾਂਜੀ ਨਾਨਕ ਨਾਇ ਸੁਣੀਐ ਮੁਖ ਉਜਲੇ ਨਾਉ ਗੁਰਮੁਖੀ ਧਿਆਵੈ ਨਾ ਨਾ ਕਹਣਾ ਨਾਇ ਸੁਣੀਐ ਨਾਮ ਦੇ ਸੁਣ ਲਵੇ ਕੋਈ ਮੁਖ ਉਜਲੇ ਖਿਰਦਾ ਉਜਲ ਹੋ ਜਾਂਦਾ ਬਿਲਕੁਲ ਕੋਈ ਦਾਗ ਨਹੀਂ ਰਹਿੰਦਾ ਨਾਉ ਗੁਰਮੁਖੀ ਧਿਆਵੈ ਗੁਰਮੁਖ ਐਸਾ ਗੁਰਮੁਖ ਫਿਰ ਨਾਮ ਦੇ ਵਿੱਚ ਹੀ ਦਿਲ ਲੱਗਦਾ ਉਹਦਾ ਤੇ ਆਮ ਨਾਮ ਨਾਲ ਜੁੜਿਆ ਰਹਿੰਦਾ ਹੈ ਨਾਮ ਦੀ ਉਹ ਭੁੱਖ ਰਹਿੰਦੀ ਹੈ। ਮਾਇਆ ਦੇ ਵਿੱਚ ਤਾਂ ਜਾਂਦਾ ਹੀ ਨਹੀਂ ਉਹਦਾ। ਠੀਕ ਹੈ ਜੀ। ਇੱਥੇ 8ਵੀਂ ਪੌੜੀ ਸਮਾਪਤੀ ਹੈ ਜੀ।